ਵਡਹੰਸ ਕੀ ਵਾਰ ਮਹੱਲਾ ਚੋਥਾ ਲੱਲਾ ਬਹਿਲੀਮਾ ਕੀ ਤੋਂ ਨਹੀਂ ਗਾਵਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਤੀਜਾ ਸ਼ਬਦ ਰਤੇ ਵਡਹੰਸ ਹੈ ਸਚ ਨਾਮ ਉਰਤਾਰ ਸੱਚ ਸੰਗ੍ਰਹਿ ਸਦ ਸੱਚ ਰਹੈ ਤੱਜੇ ਨਾਮ ਪਿਆਰ ਜਬਦ ਰਤੇ ਵਡਹੰਸ ਹੈ ਛਾਚਾ ਉਰਤਾਰ ਹੀ ਦੇ ਦੇ ਵਿੱਚ ਛਾਚਾ ਕੀਤਾ ਹੈ ਹਰ ਪੱਜ ਸੰਗਰੇ ਸੱਦ ਸੱਚ ਰਹੇ ਸੱਚੇ ਨਾਮ ਪਿਆਰ ਸੱਦ ਸੱਚ ਰਹੇ ਸੱਚੇ ਰੂਪ ਪਿਆਰੇ ਸਦਾ ਸੱਚ ਦੇ ਨਾਲ ਜੁੜੇ ਰਹੇ ਨੇ ਸੱਚਾਰੇ ਵਗੇ ਰਹਿੰਦੇ ਨੇ ਸੱਚ ਨੂੰ ਨੇ ਸਮਝਦੇ ਨੇ ਸੱਚੇ ਰੂਪ ਨਾਲ ਪਿਆਰੇ ਠੀਕ ਹੈ ਜੀ ਇਹ ਜਿਹੜਾ ਸ਼ਬਦ ਰਤੇ ਵਡਹੰਸ ਹੈ ਇਹ ਵੀ ਵਡਹੰਸ ਕੌਣ ਹੁੰਦਾ ਹੈ ਜੀ ਹਾਂ ਵਡਹੰਸ ਦੀ ਡਿਵਿਸ਼ਨ ਇਹ ਕਿੰ ਨਾਲੇ ਵਡਹੰਸ ਰਾਗ ਦੇ ਅਰਥ ਇਹ ਨੇ ਉਹ 108 ਵਾਲੇ ਵੱਡੇ ਹੋ ਗਏ ਠੀਕ ਹੈ ਜੀ 108 ਵਾਲੇ ਛੋਟੇ ਉਹ ਵੀ ਹੰਸ ਨੇ ਇੱਥੇ ਕਹਿੰਦਾ ਸ਼ਬਦ ਰੱਤੇ ਵੱਡ ਹੰਸ ਸ਼ਬਦਦਰੰਤ ਨੂੰ ਨਿਖੇਲ ਜੜੇ ਉਹ ਵੱਡੇ ਹੰਸ ਨੇ ਸਾਰੇ ਹੀ ਅੱਛਾ ਜੀ ਠੀਕ ਹੈ ਜੀ ਸ਼ਬਦ ਰੱਤੇ ਵੱਡ ਹੰਸ ਹੈ ਸੱਚ ਨਾਮ ਉਰਤਾਰ ਠੀਕ ਹੈ ਤੇ ਸੱਚ ਨੂੰ ਉਹ ਸੰਗਰਦੇ ਸੱਚੇ ਇਕੱਠਾ ਕਰਦੇ ਆ ਸੱਚ ਦੇ ਨਾਲ ਪਿਆਰ ਰੱਖਦੇ ਆਂ ਜੀ ਸੱਚ ਤੋਂ ਮੈਨਾਂ ਹੋਰ ਕੇ ਜੀਵਨ ਵਾਸਤਾ ਹੀ ਨਹੀਂ ਸਦਾ ਨਿਰਮਲ ਮੈਲ ਨਾ ਲੱਗਈ ਨਦਰ ਕੀਤੀ ਕਰਤਾਰ ਨਾਨਕ ਹਉ ਕੇ ਬਲਹਾਰਣੇ ਜੋ ਆਂ ਦਿਨ ਜਪੈ ਮੁਰਾਰ ਸਦਾ ਨਿਰਮਲ ਸਦਾ ਨਿਰਮਲ ਲੈਂਦੇ ਵਹਿਤੋ ਦੂਰ ਨੇ ਤੇ ਭਾਇ ਤੋ ਦੂਰ ਨੇ ਭਾਇ ਹੈ ਸਦਾ ਨਾ ਨਦਰ ਕੀਤੀ ਕਰਤਾਰ ਉਨਤੇ ਸਰਤਾ ਦੇ ਹੀ ਬਹਿੜ ਹੈ ਕਰਤਾਰ ਦੀ ਕਿਰਪਾ ਅੰਦਰ ਤੇ ਆਇਆ ਵਲਿਆ ਜੀ ਅਨ ਜੋ ਅਨ ਦਿਨ ਜਪੈ ਮੁਰਾਰ ਹੈ ਜੀ ਗੁਰਾਲੀ ਅੱਬਲਾ ਪਰਮੇਸ਼ਰ ਦੀ ਗੱਲ ਨਹੀਂ ਹੈ ਆਪਣੇ ਮੂਲ ਦੀ ਗੱਲ ਹੈ ਜੀ ਦੇਖੋ ਜਿੱਥੇ ਕਮਾਇਆ ਹੋ ਤਾਂ ਮੂਲ ਦੋਇ ਉਹਨੂੰ ਕਰਵਲ ਨੂੰ ਤਾਂ ਮੁਕਾਬਲਾ ਹੀ ਨਹੀਂ ਪਰਮੇਸ਼ਰ ਨੂੰ ਤਾਂ ਆ ਗੱਲ ਵੱਡੀ ਏ ਜਾਂ ਇਹਨੇ ਹਥਿਆਰ ਛੱਡ ਦੇ ਠੀਕ ਹੈ ਜੀ ਮਹੱਲਾ ਤੀਜਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀ ਆ ਸੰਗ ਜੇ ਜਾਣਾ ਬਗ ਬੱਪੜਾ ਜਨਮ ਨਾ ਬੁੱਧੀ ਬੋਲਦੀ ਆ ਮੈਂ ਤਾਂ ਵਡਹੰਸੇ ਨੂੰ ਜਾਣ ਲਿਆ ਏਹੀ ਹੈ ਤਾਂ ਕੀ ਆ ਸੰਤ ਮੈਂ ਦੀ ਸੰਗ ਸੰਭ ਤੇ ਤਾਂ ਇਹਹੀ ਬੁੱਧ ਇਹ ਇਹ ਵਡਹੰਸ ਤੋਂ ਜੇ ਜਾਣਾ ਬਗ ਬੱਪੜਾ ਜੇ ਤਰਦਾ ਤਾਂ ਬਗਲਾ ਹੈ ਵੱਲੀਆ ਖੰਡਾ ਮਾਇਆ ਦੀ ਕੋਖ ਹੈ ਰੂ ਜਲਮਨਾਦਨੀ ਆ ਮਾਤਾ ਜਨਮਦੀ ਸਾਰੇ ਇਹ ਤੋਂ ਲੱਗੋ ਜਾਂ ਇਹ ਤੋਂ ਲੱਗ ਰੇ ਜਨਮ ਤੱਕ ਬਾਹਰ ਬਗਲਾ ਸੀ ਹਾਂ ਉਹ ਹੈ ਠੀਕ ਹੈ ਜਿਵੇਂ ਅੱਜ ਕੱਲ ਆਪਾਂ ਨੂੰ ਪੈਂਦਾ ਕੱਪੜੇ ਪਾ ਕੇ ਕੋਈ ਸਾਧ ਦੇਖ ਕੇ ਆਪਾਂ ਵੀ ਸੋਚਦੇ ਹਾਂ ਸ਼ੈਲੇ ਵਡਹੰਸ ਹਾਂ ਬਸ ਸਾਡਾ ਉਹੀ ਗੱਲ ਹੈ ਗੱਲ ਹੀ ਹੈ ਤੀਸਰੇ ਪਾਸ਼ਾ ਦਾ ਸ਼ਲੋਕ ਹੈ ਉਹਨਾਂ ਨੇ ਤਾਂ ਇਹ ਚੀਜ਼ਾਂ ਬਹੁਤ ਦੇਖੀਆਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਠੀਕ ਹੈ ਹਾਂਜੀ ਮਹਲਾ ਤੀਜਾ ਇਹ ਤਿੰਨ ਸ਼ਲੋਕ ਆ ਗਏ ਜੀ ਹੰਸਾਂ ਵੇਖ ਤਰੰਦਿਆਂ ਬੱਗਾਂ ਵੀ ਆਇਆ ਚਾਉ ਡੂਬ ਮੁਵੇ ਬੱਗ ਬੱਪੜੇ ਪਾਉ ਹੱਥ ਕਰਦੇ ਸੀਗੇ ਹੱਥ ਗੱਲ ਕਰਦੇ ਸੀ ਦੁਬਦੇ ਨਹੀਂ ਸੀ ਮਾਇਆ ਵਿੱਚ ਅੱਛਾ ਤਰੰਦਿਆਂ ਰਹਿੰਦੇ ਸੀ ਇੱਥੇ ਲ ਹੋਇਆ ਪਿਆ ਸਭ ਕੁਝ ਹੈ ਨਾ ਤਾਂ ਦੇ ਤਰਜ਼ਾ ਬੱਗਾਂ ਵੀ ਆਏ ਚਾਹੇ ਬੱਗਾਂ ਦਾ ਮਨ ਇਹਨਾਂ ਨੂੰ ਵੀ ਚਾਹ ਆ ਗਿਆ ਸੀ ਕੁਰਬਾਨ ਯਾਰ ਕਰਦੀਏ ਕੀ ਕਰਦੀਏ ਕਤਬਾਂ ਲਿਖਦੀ ਤੇ ਬਗਿਆਨ ਦੀਆਂ ਕਿਤਾਬਾਂ ਲਿਖੀਆਂ ਨੇ ਇਹ ਵੀ ਲੈਕਚਰ ਕਰਦੇ ਨੇ ਇੱਕੋ ਹੀ ਤਰਜ਼ਾ ਸਭ ਨੂੰ ਬੇਰ ਨਾਏ ਬੰਗ ਬੱਪਣ ਤੇ ਤਲ ਪਾਉ ਗਲ ਪੁੱਠੀ ਕਹਿ ਗਏ ਕਮੇਟੀ ਦਾ ਫਰਲੋ ਪੁੱਠੀ ਗੱਲ ਕਰ ਗਈ ਉਹ ਵੀ ਗੱਲ ਕਰਦਾ ਪੁੱਠੀ ਕਹੀ ਗਈ ਦੀ ਗੱਲ ਨਹੀਂ ਕਹਿ ਸਕਦੇ ਬਾਪ ਪਰੋਪਰੇ ਬਸ ਨਹੀਂ ਕਹਿੰਦੇ ਗੱਲ ਕਹਿਤੀ ਵੀ ਬੰਨੇ ਪਾਪੀ ਲੇਖ ਜਮਨ ਜਮਨ ਪਰਮੇ ਤੇ ਤਾਲੂ ਪਰ ਪਾਉਂ ਸਾਖਤਾ ਦੀ ਮਤਾਈ ਉਲਟੀ ਹੋ ਖਾ ਲਿਆ ਚਲੇ ਗਏ ਉਹਨਾਂ ਦੀ ਰੀਤ ਹੈ ਕਿ ਅਜੇ ਤੇ ਸਰਤਾਲੂ ਪਰ ਪਾਉਂ ਹੋਵੇ ਠੀਕ ਹੈ ਉਲਟੇ ਅਰਥ ਕਰਤੇ ਠੀਕ ਅਰਥੇ ਪੁੱਠੇ ਕਰਤੇ ਠੀਕ ਹੈ ਜੀ ਹਾਂਜੀ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਵਰਨਾ ਬੀਆ ਤੂੰ ਆਪੇ ਹੀ ਆਪ ਆਪਨ ਤੇ ਤੂੰ ਦਾਲ ਵਿੱਚ ਸੀ ਤੂੰ ਆਪੇ ਹੀ ਸੀ ਦੋਧਾਂ ਵਿੱਚ ਸੀ ਹੂੰ ਹਾਂਪੇ ਹੀ ਆਪ ਆਪ ਸੀਗਾ ਉਧਰ ਵੀ ਉਧਰ ਵੀ ਅੱਛਾ ਜੀ ਸਜਾਸ ਵੀ ਤੂੰ ਤੇ ਖਬਾਦੀ ਤੂੰ ਹੁਣ ਆਪੇ ਆਪ ਨਿਰਕਾਰ ਇਕੱਠਾ ਹੋ ਗਏ ਕੋਵੇ ਕੋਵੇ ਤੂੰ ਦਾਲ ਵਿੱਚ ਵੀ ਦੋ ਉਹੀ ਸੀ ਨੇ ਪਹਿਲਾ ਹੈਗਾ ਆਪ ਕਾਰਨ ਕੀਆ ਸਹੀ ਕਾਰਨ ਸੀ ਅੱਛਾ ਕਹ ਲੀ ਅੱਛਾ ਜੀ ਹੋ ਗਿਆ ਆਪ ਕਾਰਨ ਕੀਤਾ ਠੀਕ ਹੈ ਜੀ ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰਨਾ ਬੀਆ ਤੂੰ ਆਪੇ ਆਪ ਨਿਰੰਕਾਰ ਕੋਈ ਅਵਰ ਮੇ ਵੀ ਆ ਦੂਜਾ ਕੋਈ ਨਹੀਂ ਹੈ ਸਾਰ ਵੀ ਤੁਸੀਂ ਠੀਕ ਹੈ ਜੀ ਤੂੰ ਕਰਨ ਕਾਰਨ ਸਮਰੱਥ ਹੈ ਤੂੰ ਕਰੇ ਸੋthia ਤੂੰ ਅਣ ਮੰਗਿਆ ਔਰ ਕਾਰਨ ਕਰਨ ਦਾ ਅਰਥ ਸਮਝਾਓ ਕਰਨ ਤੇ ਕਾਰਨ ਦਾ ਕੀ ਪਰ ਆਪਸ ਚ ਕੀ ਫਰਕ ਕਰਕੇ ਕਰਨ ਅੱਛਾ ਜੀ। ਕਾਰਨਵਾਲ ਜੋ ਦੰਗਿਆ ਦੇਖ ਪੈਦਾ ਤਾਂ ਅਕਾ ਟੁੱਟ ਕੇ ਦੇਖ ਪਿਆ। ਭਾਇਆ ਵਿੱਚ ਕਾਰਨ ਬਣ ਗਿਆ। ਤੇ ਭਾਇਆ ਜਲਵਾਇਆ ਵਿੱਚ ਫਸ ਗਿਆ ਮਨ। ਕਾਰਨ ਬਣ ਗਿਆ ਸੱਡਣ ਦਾ। ਇਤਨੇ ਨਾਲ ਜਿੱਤ ਵੀ ਨਾਲ ਹੈਗਾ। ਤੇ ਫਿਰ ਪੂਰ ਕੱਢਦਾ ਰੁਕਦਾ। ਕਾਰਨ ਨਾਲ ਵੀ ਛੱਡਦਾ ਸਾਬੂਰ। ਇਹਦਾ ਹੀ ਰੂਪ। ਅੱਛਾ ਜੀ। ਬਲੂ ਤਾਂ ਸਾਫ ਤਾਂ ਦਿਨ ਬਤਾ ਨਹੀਂ ਕਰ ਸਕਦਾ। ਵੀ ਇੰਨਾ ਆਹ ਵੀ ਫਸਿਆ ਹੈ ਉਹ ਕੋਈ ਬਾਹਲਾ ਕੱਢੂ ਸਾਫ ਫਸਿਆ ਦੀ ਹੋਇਆ। ਤੂੰ ਕారణ ਕਾਰਣ ਸਮਰੱਥ ਹੈ ਤੂੰ ਇਹਦਾ ਭਾਵ ਮਨ ਨੂੰ ਕਿਹਾ ਚਿੱਤ ਨੂੰ ਕਿਹਾ ਇਸ ਬੋਲ ਵੀ ਜੀ ਕਹਿਣ ਦਾਲ ਨੂੰ ਇੱਕ ਬਣਾਉਣ ਦੇ ਸਮਰੱਥ ਹੈ ਜੀ ਆਪਣਿਆ ਵੇ ਬਣ ਅੱਛਾ ਆਪਣੀ ਬੱਜੀ ਨਾਲ ਬਣ ਜਾਂਦਾ ਕੋਈ ਨਾ ਹਾਂਜੀ ਜੇ ਮਾਂਜੀ ਕੱਪੜੇ ਖੋਲ ਕੇ ਢੋਬੇ ਜਿ ਮੜ ਜਾਂਦਾ ਨਿਕਲ ਨਹੀਂ ਉਦਾ ਫਿਰ ਦੂਰ ਮਾਰਦਾ ਠੀਕ ਹੈ ਇੱਕ ਨੂੰ ਸਮੋਧਣਾ ਤੂ ਕਰਨ ਕਾਂ ਸਮਰੱਥ ਹੈ ਤੂੰ ਕਰੈ ਸੋ ਥੀਆ ਆ ਫਿਰ ਉਹ ਵੀ ਤਾਂ ਆ ਗਿਆ ਲੈ ਤੂੰ ਅਣ ਮੰਗਿਆ দান ਦੇਵਣਾ ਸਭ ਨਾਹਾ ਜੀਆਂ ਫਿਰ ਦੀ ਗੱਲ ਆ ਰਹੀ ਹੈ ਕਿ ਇੱਥੇ ਵੀ ਅਜੇ ਮੂਲੇ ਚੱਲਦੇ ਉਹ ਪਰਮੇਸ਼ਰਾਂ ਨੇ ਇੱਕ ਤ ਵਾਰ ਕਹੀ ਹੈ ਰਾਵਾਂ ਤਾਂ ਜਾ ਕੇ ਇੱਕ ਤ ਵਾਰ ਤੋਸਰੀ ਇੱਕ ਅੱਛਾ ਜੀ ठीक है जी सब आखो ਸਤਗੁਰ ਵਾਹ ਵਾਹ ਜਿਨਿ दान हर नाम मुख ਜਿਹਦੇ ਉੱਤੇ ਵਿੱਚ ਲੋਕਦਾਨ ਪਾਤਾ ਔਰ ਵਾਹ ਵਾਹ ਕਹੋ ਠੀਕ ਹੈ ਪਰ है ਦੇ ਸਕਦਾ ਹੈ है ਹੀ ਸਤਗੁਰ ਨੂੰ ਵਾਹ ਵਾਹ ਕਿਹਾ